ਦੀ ਬੇਕੂਰੂਪ ਜਨਾਨੀ ਜਿਹੜੇ ਤੋਂ ਲੈ ਤੇ ਸੁੱਕੇ ਸੀ ਮੇਰੇ ਅਖੇ ਸੁੱਕੇ ਹੋਏ ਵੇਰ ਰੱਖਿਓ ਸੀ ਜਿਹੜੀ ਮੇਰੀ ਦੀ ਮਿੱਠੇ ਵੇਰ ਦੇਖਦੀ ਸੀ ਇੱਕ ਵੇਰ ਕੋਈ ਬੜੀ ਗੱਲ ਨਹੀਂ ਪ੍ਰੇਮ ਅਕੇ ਨੇ ਮਈ ਰਹਿਦਾ ਪਰ ਵੇਰ ਰਾਮ ਦੇ ਗਰੂ ਜਿੱਤੇ ਤੇ ਰਾਮ ਲਖਮਣ ਜੀ ਬੜੇ ਹਾਰਾ ਪਿਆਰੂ ਜੀ ਸਾਡੇ ਭਰਾ ਕੀ ਕਰਦੇ ਸਜਣਾ ਸ਼੍ਰੀ ਰਾਮ ਕੇਂਦਰ ਨੇ ਆਧਿਆਨ ਕਰਦਾ ਤੂੰ ਹੀ ਅਖੇ ਬਿਆਨ ਤੈਰਾ ਵੀ ਭਲਾ ਹੋਇਆ ਉਹ ਮਗਾਂ ਦੇ ਉੱਤੇ ਤੋਂ ਸੁਬੀ ਜਾਂਦੇ ਪੀਰ ਅਗੇ ਚੰਗਾ ਹੋਰ ਸਰਬੀਵਣੀ ਮੂਰਤੀ ਬਣੀ ਲਕਸ਼ਮਣ ਜੀ ਦੀ ਮੂਰਤੀ ਖੁੱਲੀ ਸਜਣਾ ਆਗੋ ਕਥਾ ਬੜੀ ਨੰਪੀ ਹੈ ਹੁਣ ਪੰਪਾ ਜਿਹੜੇ para <todos> o ਜਿਨੂੰ ਉਤਰੇ ਆ ਜਾ ਗੱਜ ਕੇ ਅੱਖੋਂ ਤਾਂ శ్రీ ਰਾਮ ਚਨ ਕੀ ਗੱਜ ਲੋ ਹੁਣੋਂ ਪੰਪਾ ਸਾਰ ਰਖੀ ਜਿਹੜੇ ਸੀ ਉਹ ਦੰਗ ਖਰਾਬ ਹੋ ਗਿਆ ਉਹ ਕਹਿੰਦੇ ਵੀ ਬੜਾ ਬੜਾ ਜਦੋਂ ਸਰ ਹੋਏ ਤੇ ਕੀ ਹੈ ਮੈਂ RAMCHANDRO HI A JAH KE SHRI RAMCHANDRA JI DA SALAM KIYA PRANAM KARE MARAN JI KIRPA KARO KERA PUMPA SAR TALA DA JAL श्री रामचंद्र जी कहंदे हैं चलो भाई सानु लचुन हुन लक्ष्मण नु वाकेया भाई लक्ष्मण जी ए जल त्र निर्मल करन पावेले तान लक्ष्मण जी कहंदे भाई चंदा मेरे जल चन्न पाटे जे जल पवित्र हो जा ते चंगी कर जल्ट पे जल्ट पे जल्ट ते ले लक्ष्मण ने चन्न पाए जे जल के अंदर ते श्री रामचंद्र जी कहंदे वे होन चंदा असली वे चन्न पाले ने बहोत स्नान नहीं कर लंदी रामचंद्र जी विच स्नान लपा ਯਾ ਲੱਗੇ ਨਾ ਵੀ ਬੰਦੇ ਯਾਰ ਸੀਤਾ ਦਾ ਵੀ ਸਾਰੇ ਰਿਤੀ ਮੂਨੀ ਅਖੇ ਕਿ ਹੁਣ ਸਾਡੀ ਕੋਈ ਬਾਣ ਨਹੀਂ ਹੋਰ ਧਰ ਸਾਡੇ ਪਾ ਕੋਈ ਨਹੀਂ ਹੋਣਿਆ ਤੀਨੀ ਆਂ ਜਾਰੀ ਬਾਤ ਦੇਖ ਲਓ ਜੀ ਜੰਗ ਪਾਣ ਦੇ ਅੱਗੇ ਨਾ ਵੀ ਬਿਦਰ natia ਆਪੇ ਮਰ ਜਾਂਦਾ ਆਪੇ ਸਿਆਪੇ ਕਰਦਾ ਉਹ ਆਪੇ ਆਪ ਸਭ ਕੁਝ ਦਾ ਹੈ ਤਾਲੁਕ ਜਿਹੜਾ ਨਿਰਗੁਣ ਜਿਹੜਾ ਹੈ ਉਹ ਸਰਦਨ ਕਈ ਲੋਕ ਕਹਿੰਦੇ ਨੇ ਹੁਣ ਸੀਤਾ ਦਾ ਕਹਾ ਕੇ ਚਲੋ ਜਿਹੜੀ ਰਾਮਚੰਦਰ ਜੀ ਮੁਕਤੀ ਕਾਲ ਰਾਮੁ ਸੀਤਾ ਨੂੰ ਛਾਲ ਲੈ ਗਿਆ ਸੂਪ ਨਕਾ ਆਈ ਕਿ ਨਾਲ ਨਾ ਨਕ ਪਰ ਈਦਾਂ ਨੂੰ ਛੜਕੇ ਲੱਗਿਆ 라वण ਤੇ ਖੇਡ ਬਣਾਉਣੀ ਸੀ శ్రీ ਰਾਮ ਜੀ ਦੇ ਪਤੀ ਨੇ ਲੰਕਾ ਉ ਕੀਤੀ ਤੇ ਪੰਚ ਸਾਕੋ ਦੇ ਵਿੱਚ ਪੋਗਣ ਦੀ ਸੀ ਛੇਦ ਕੀਏ ਜਲ ਸਾਗਰ ਪੈ ਸਭ ਅਦਾ ਕਰੀ ਬਸਨਾਪਸ ਕੇ ਜਨ ਬਹਨ ਸਵਾਏ ਸ਼ਿਆ ਸਮੇਤ ਨਮੋਤਨ ਕੋ ਇੱਕ ਆਸਾਂ ਬਾਸ ਮਹਾ ਹਲਕਾਰੇ ਮਨ ਕਿਸਵੇਂ ਰਾਵਣ ਸੀਤਾ ਨੂੰ ਲੈ ਗਿਆ ਚੁਰਾ ਕੇ ਗ੍ਰਾਂਥਾ ਉਹਦੀ ਪਾਣੀ ਵਿੱਚ ਲਿਖਿਆ ਸਾਡੇ ਰਾਮ ਕਾਨੀ ਦੀ ਬਾਹਰ ਦੇ ਵਿੱਚ ਲਿਖਿਆ ਹੈ ਰਮਦਾ ਰਾਮ ਚੱਲੇ ਆਹ